ਸਲੋਪ ਪੂਰਾ ਪ੍ਰਭ ਅਰਾਧਿਆ ਪੂਰਾ ਜਗਾ ਨੋ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰਾ ਪ੍ਰਭ ਅਰਾਧਿਆ ਪੂਰਾ ਜਗਾ ਨੋ ਪਰ ਪੂਰਾ ਪ੍ਰਭ ਕੀ ਹੈ ਤੂ ਕੋਲਨ ਵਰਮ ਹੈ ਪੂਰਾ ਪ੍ਰਭ ਹੈ ਪਹਿਲਾਂ ਪ੍ਰਭ ਆਇਆ ਸੀ ਪ੍ਰਭ ਜਿਹੜਾ ਅਤਰਾਤਮਾ ਸੀ ਉਹ ਪ੍ਰਭ ਸੀ ਜਿਹਦੇ ਤੇ ਜਿਹੜਾ ਅੱਪ ਕਹਿੰਦੇ ਸੁਤਮ ਇਹ ਪ੍ਰਭ ਹੈ ਸਟਾਰਟਿੰਗ ਐਟ ਯੂ ਆਰ ਹਾਂ ਪ੍ਰਭ ਤੇ ਸਮਰਨ ਨਹੀਂ ਇਸ ਤਰ੍ਹਾਂ ਦੀ ਦੂੰ ਸਰਵਾਨ ਪ੍ਰਾਪਤਾ ਚਲਣਾ ਸੀ ਪੂਰਨ ਪ੍ਰਭ ਹੋ ਜਾਣਾ ਸੀ ਪ੍ਰਭ ਤੋਂ ਚੱਲ ਕੇ ਪੂਰਨ ਪ੍ਰਭ ਤੱਕ ਪਹੁੰਚ ਗਏ ਆਰਾਧਨਾ ਪੂਰਨ ਪ੍ਰਭ ਦੀ ਹੁੰਦੀ ਆ ਸਗੁਣ ਪ੍ਰਭ ਦਾ ਹੁੰਦਾ ਆਰਾਧਨਾ ਪੂਰਨ ਪ੍ਰਭ ਦਾ ਹੈ ਪੂਰਨ ਪ੍ਰਭ ਆਰਾਧਦਾ ਪ੍ਰਭ ਦਾ ਸਮਰਨ ਹੈ ਪ੍ਰਭ ਸਮਰਨ ਕਰਦਾ ਸੋੜ ਕੀ ਗੱਲ ਦਾ ਪ੍ਰਭ ਪ੍ਰਭ ਆਪਣੇ ਜਿਹੜੀ ਪੂਰਨ ਉਹਦਾ ਹੈ ਸਰੂਪ ਪੂਰਨ ਪ੍ਰਭ ਦਾ ਸਰੂਪ ਹੈ ਜਿਹੜਾ ਉਹਦਾ ਹਸਮਣ ਦਾ ਸੀ ਮੈਂ ਤਾਂ ਪੂਰਾ ਸੀ ਮੇਰੇ ਅੰਦਰ ਦਾ ਦਾਇਰਾ ਉਹ ਢੇਰਾ ਬਹੁਤ ਦੂਰ ਤੱਕ ਮੇਰੇ ਤਾਂ ਦੂਰ ਤੱਕ ਸੀ ਆ ਵਿਚਾਲੇ ਜਿਹੜਾ ਹੁਣ ਮੇਰੀ ਅੱਖ ਵੀ ਨਹੀਂ ਵਿਚਾਲੇ ਢੇਰਾ ਆ ਗਿਆ ਮੇਰੀ ਅੱਖ ਡਿਫੈਕਟਿਵ ਹੋ ਗਈ ਧਰਮ ਦਾ ਜਾਲਾ ਪੈ ਗਿਆ ਅੱਖ ਚ ਮੈਨੂੰ ਤਾਂ ਪਾਤਕ ਨਹੀਂਦਾ ਸੀ ਮੇਰੇ ਤੋਂ ਵਿਚਾਰੇ ਕੋਈ ਸਹੀ ਨਹੀਂ ਸੀ ਐਸੀ ਚੀਜ਼ ਜਿੱਥੇ ਮੇਰੀ ਨਗਾ ਅੜਕ ਜਿਵੇਂ ਇਹ ਜਿਹੜਾ ਮੇਰੀ ਕਿੱਥੇ ਪਾਇਆ ਤੇ ਅੜਕਣਾ ਸੀ ਹੁਣ ਮਾਇਆ ਦਾ ਗਾੜੀ ਜਦੀ ਜਾਲਾ ਪੈ ਗਿਆ ਧਰਮ ਦਾ ਉਹ ਜਾਲਾ ਪਰਖਾ ਜਾਲਾ ਕੱਟਣ ਦਾ ਸੀ ਉਹਦੇ ਰਾਜ਼ ਨਾ ਸੀ ਇਹ ਪੂਰੇ ਪ੍ਰਭਾ ਦਾ ਸਰੂਪ ਹੈ ਉਹ ਅੱਖ ਵੇਰੀ ਹੋਵੇ ਪੂਰੇ ਪ੍ਰਭਾ ਵਿੱਚ ਆ ਜਿਹੜਾ ਜਾਲਾ ਲੱਗਿਆ ਸੂਤ ਕੱਖ ਨੂੰ ਇਹਦਾ ਇਲਾਜ ਕਰਿਆ ਸੀ ਇਹਦਾ ਨਾਲ ਹੋਏ ਇਹਦਾ ਸੀ ਜੋ ਸਮਣ ਪ੍ਰਭ ਕਰ ਆ ਪ੍ਰਭ ਨੇ ਸਮਣ ਕਰਨਾ ਉਹ ਉਹਨੇ ਪੂਰੀ ਤਾਂ ਹੋ ਗਈ ਉਹ ਅੱਖ ਦਾ ਸਿਰਫ ਰੋਗ ਰੋਗ ਦੂਰ ਹੋਏ। ਉਹਨੂੰ ਪ੍ਰਾਪਤਾ ਹੋ ਗਿਆ। ਪਹਿਲਾਂ ਤਾਂ ਮੰਨ ਲਈ ਸੀ ਕਿ ਅੱਖ ਦਾ ਤਾਂ ਅਨੇਕ ਆ ਗਿਆ ਇੱਕ ਹੋ ਗਿਆ। ਉਹ ਆਰਾਧਨਾ ਇਸ ਗਲਤੀ ਹੈ ਕਿ ਕੰਨ ਔਰ ਅੱਖ ਦੇਖਦਾ ਲਿਆ ਉਹਨੇ। ਦੇਖਣਾ ਤਾਂ ਕਿਸੇ ਰੂਪ ਦੀ ਸੀ ਅਸਲ ਜੀ। ਜਦ ਆ ਪੂਰਾ ਹੋ ਗਿਆ ਇੱਕ ਤਰ੍ਹਾਂ ਦਾ ਸਮਝ ਗਿਆ ਪੂਰੇ ਦਾ ਸਮਝ ਗਿਆ ਭਈ ਬਾਹ ਜੋ ਬਰਾ ਭਾ ਪੂਰਾ ਜਾਂ ਆਹੀ ਪੂਰਾ ਹੁੰਦਾ ਇੱਕ ਦਾ ਸਮਝ ਗਿਆ ਹੋਈ ਕੀ ਹੁੰਦਾ ਇੱਕ ਦਾ ਉਹਨੇ ਦੇਖ ਲਿਆ ਉਹ ਇੱਕ ਹੋ ਕੇ ਉਗਵਿਆ ਦਾ ਰੂਪ ਨਹੀਂ ਦੇਖਿਆ ਜਿਹੜਾ ਇੱਕ ਹੋ ਕੇ ਉਗਵਿਆ ਉਹ ਰਹਿ ਗਿਆ ਉਹ ਕੀ ਆ ਉਹ ਨਾਮ ਉਹਦਾ ਹੁਕਮ ਪੂਰਾ ਪ੍ਰਭ ਦਾ ਸਬਦ ਪੂਰਾ ਕਾ ਉਹਦਾ ਹੁਕਮ ਵੀ ਪੂਰਾ ਪੂਰੇ ਪ੍ਰਭ ਦਾ ਹੁਕਮ ਪੂਰਾ ਅਧੂਰੇ ਪ੍ਰਭ ਦਾ ਹੁਕਮ ਵੀ ਅਧੂਰਾ ਮਾਨਾ ਅਧੂਰਾ ਪ੍ਰਭਾ ਪਹਿਲਾਂ ਜਿਹੜਾ ਬ੍ਰਹਮਾ ਅਧੂਰਾ ਪ੍ਰਭਾ ਜੋ ਚਾਹੁੰਦਾ ਹੁੰਦਾ ਨਹੀਂ ਤੂੰ ਲੇ ਕੇ ਕੀ ਸਭ ਹੀ ਪੂਰੇ ਦਾ ਕੀ ਸਭ ਕੁਝ ਪੂਰਾ ਪ੍ਰਭਾ ਰਾਦਾ ਪੂਰਾ ਜਾਗਾ ਨਾ ਪੂਰਾ ਜਾਗਾ ਨਾ ਨਾਨਕ ਪੂਰਾ ਪਾਇਆ ਪੂਰਾ ਪ੍ਰਭਾ ਰਾਦਾ ਬੁੱਧੀ ਨੇ ਪੂਰਾ ਜਾਗਾ ਨਾ ਰਾਜਾ ਜਿੱਤੀ ਸਾਚਖਾਂਡਾਲੇ ਪੂਰੇ ਪ੍ਰਭੇ ਨੇ ਉਹ ਸਾਚਖਾਂਡਾਲੇ ਪੂਰੇ ਪ੍ਰਭੇ ਨੇ ਸਾਰੇ ਹੋਰ ਆਵਾਦਨਾ ਹੀ ਤੁਸੀਂ ਪੂਰਾ ਨਾ ਹੋਣਾ ਦਾ ਇਹ ਪੂਰਾ ਉਹਨਾਂ ਦਾ ਹੁਕਮ ਪੂਰਾ ਪੂਰਾ ਜਾਗਾ ਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਰੂ ਗੋਬਿੰਦ ਪੂਰੇ ਗੁਰੂ ਫੇਰ ਪੂਰਾ ਆराधना ਤੇ ਬਣਾ ਪੂਰਾ ਪਾਇਆ ਤਾਂ ਸ਼ਬਦ ਸ਼ਬਦ ਦਾ ਮੇਲ ਹੋਇਆ ਤਾਂ ਸ਼ਬਦ ਗੁਰੂ ਨਾਲ ਸੰਪਰਕ ਹੋਇਆ ਫੇਰ ਗੁੰਗਾਨ ਸ਼ੁਰੂ ਹੋਇਆ ਬ विवेक ਦੀ ਇਹ ਗੱਲ ਹੈ ਬ विवेक बुद्धि बोलਦੀ ਹੈ ਆराधना ਕੀਤੀ ਮੈਂ ਪੂਰੇ ਪ੍ਰਭੂ ਦੀ ਪ੍ਰਭੂ ਦਾ ਸ਼ਬਦ ਕੀਤਾ ਫੇਰ ਪੂਰੇ ਪ੍ਰਭੂ ਦੀ ਆराधना ਕੀਤੀ ਪੂਰੇ ਪ੍ਰਭ ਦਾ ਸਰੂਪ ਜੀ ਦਰਸ਼ਨ ਕਰ ਲਿਆ ਪੂਰਾ ਪ੍ਰਭ ਵੀ ਹੋ ਗਿਆ ਆਪਣਾ ਪ੍ਰਭ ਜਿਹੜਾ ਸੀ ਆਪਣੇ ਪ੍ਰਭ ਦੀ ਕਮਨੀ ਹੋ ਵੀ ਦੂਰ ਹੋ ਗਈ ਨਾਲਕ ਪੂਰਾ ਪਾਇਆ ਪੂਰੇ ਕੇ ਗੁਣ ਦਾ ਪੂਰਾ ਪਾਇਆ ਨਾਲਕ ਪੂਰਾ ਪਾਇਆ ਪੂਰਾ ਕੀ ਪਾਇਆ ਹੁਕਮ ਪੂਰਾ ਇਹ ਵੀ ਪੂਰਾ ਹੀ ਹੈ ਪੂਰੇ ਪ੍ਰਭ ਦਾ ਹੁਕਮ ਪੂਰਾ ਪੂਰੇ ਕੇ ਗੁਣ ਜਿੰਨਾ ਜਦ ਸ਼ਬਦ ਨਾਲ ਸੰਪਰਕ ਨਹੀਂ ਹੋਗਾ ਉਹ ਕੋਈ ਨਹੀਂ ਰਾਇਆ ਜਾ ਸਕਦਾ ਤੋੜੇ ਉਸਤਾ ਉਹਨੇ ਬੁਤੀ ਦੇਵਨੀ ਕੋਲ ਗਿਆ ਕਸਰ ਦੀ ਤਬ ਇੱਕ ਬੁਤੀ ਕੋਲ ਗਿਆ ਕਸਰ ਉਹ ਤਾਂ ਹੁਣ ਜੈ ਜੇ ਜੋ ਬੁਲਾਇਆ ਬੁਲਾਇਆ ਬੋਲੇ ਖਸੂ ਕਰੇ ਜੇ ਮੈਂ ਹੋੜੇ ਉਹ ਹੀ ਦੱਸ ਰਹੀ ਹੈ ਜੋ ਹੋਗਾ ਪਾਣਾ ਵਰਤਿਆ ਉਹ ਦੇਖ ਕੇ ਹੀ ਦੱਸ ਰਹੀ ਹੈ ਦੇਖ ਕੇ ਹੀ ਦੱਸ ਜੋ ਸਾਹਮਣੇ ਆਪਣੇ ਚੱਲਦਾ ਉਹ ਰਹੀ ਮੈਂ ਕਰੀ ਵਾਏ ਜੋ ਸਾਹਮਣੇ ਹੈ ਉਹ ਹੀ ਦੱਸ ਰਹੀ ਹੈ ਉਹ ਵਿੱਚ ਆ ਜਿੰਨਾ ਦੇਖਿਆ ਉਹਨਾਂ ਦੇ ਦੱਸੋ ਜਿੰਨਾ ਦੇਖਿਆ ਉਹਨਾਂ ਦੇ ਦੱਸੋ ਹਾਂ oh.